ਰਹਾਉ ਦੀ ਪੰਕਤੀ ਹੈ ਜੀ ਸੁਣ पांडे ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸੁਣ पांडे ਕਿਆ ਲਿਖੋ ਜੰਜਾਲਾ ਹੈ ਪੜਨੇ ਆ ਜਿਹੜਾ ਤੂੰ ਲਿਖ ਦਿੱਤਾ ਲੈ ਇੰਕ ਰਲ ਕੇ ਮਾਰੇ ਨਮਰ ਤੇ ਜੰਜਾਲ ਬਾਤ ਚਾਹੀਦਾ ਕਹਾ ਕਰੂੰਗਾ ਗੋਪਾਲਾ ਉਹ ਪਾਲਣ ਵਾਲਾ ਉਹ ਪਾਲਣ ਵਾਲਾ ਗੁਰੂਖੀਰ ਪਾਲਣ ਦਾ ਉਹ ਐ ਦੋਹਾਂ ਦੀ ਗੱਲ ਕਰਦੀ ਸੀ ਅੱਛਾ ਜੀ ਇੱਕ ਪਾਲਣ ਵਾਲੇ ਦੀ ਪਾਲਿਆ ਜਾਂਦਾ ਉਹਦੀ ਗੱਲ ਕਰਦੀ ਸੀ ਅੱਛਾ ਪਾਲਣ ਵਾਲਾ ਇਹਨੂੰ ਪਾਲਿਆ ਜਾਂਦਾ ਜਿੱਦੀ ਫਿਰ ਪਾਲਣ ਹੈ ਕੌਣ ਫਿਰ ਪਾਲ ਦਿੰਦਾ ਆ ਵਾਲੇ ਦੀ ਸੀ ਉਹ ਛੱਡਦੀ ਹੋਰੇ ਹੋਰ ਵਿੱਚ ਲਿਖ ਬਾਰੇ ਅਜਾਹੇ ਲਖਤੀ ਗੁਰੂ ਹਾਂ ਜੀ ਜੀ ਤੁ ਆ ਬੇਸ਼ੱਕ ਟੱਚ ਕਰਦਾ ਜਿਹੜਾ ਗੁਰੂ ਨਾਨਕ ਦੇਵ ਜੀ ਤਾ ਇਹ ਬੇਸ਼ੱਕ ਟੱਚ ਦੀ ਕੀਤਾ ਪੰਡੇ ਨੇ ਅੱਛਾ ਭਰਤਾਂ ਦਾ ਪੇਸ਼ਾ ਕਿਹਨੂੰ ਲੋਕ ਇਹ ਪੰਡਾ ਕੋਈ ਅਲੱਗ ਹੈ ਜੀ ਪੰਡਿਤ ਨਾਲੋਂ ਪੰਡਤ ਦਾ ਗੋੜੂ ਹੈ ਪੰਡਾ ਅਸਲ ਜੀ ਗੁਰੂ ਪੰਡਈ ਪੱਡਕ ਦਾ ਦੋਸਤ ਜਲਟਾ ਫੰਦੇ ਅੱਛਾ ਜੀ ਉਹ ਦਸਤਖੰਦ ਤਾਂ ਪਿਆ ਹੋਇਆ ਪੱਡਕ ਲੈ ਕੇ ਜਾਂਦਾ ਅਸਲ ਅਸਲ ਪੱਡਕ ਦਾ ਮਾਲ ਦਾ ਏਰੀਆ ਪੱਡਕ ਨੂੰ ਪੜਿਆ ਹੁੰਦਾ ਤੂੰ ਨਾਲ ਲੈ ਕੇ ਆਈ ਅੱਛਾ ਜੀ ਇਰੇ ਗੁਰੂ ਜੂਰੇ ਜੂਬਾ ਦਾ ਪ੍ਰਚਾਰ ਵੀ ਕਰੀ ਜੇ ਲੋਕਾਂ ਇਹਨਾਂ ਦੇ ਵਿਆਹ ਕਾਲ ਵੀ ਨੇ ਇਹਨਾਂ ਦੀਆਂ ਆਪਣੇ ਬੁੱਢੀਆਂ ਹੋਈਆਂ ਸੀ ਹੋਏ ਪਿੰਡ ਜ਼ਗੀਰ ਵਾਲੇ ਕਿਸਮ ਦੀ ਰੋਟੀ ਪਾਣੀ ਦਾ ਸਾਧਨ ਅੱਛਾ ਜੀ ਇਹ ਦੋਨੋਂ ਉਹ ਸੀ ਜਦੋਂ ਮਰੇ ਤੇ ਜਾਂਦੇ ਹਾਂ ਕੈਸੀ ਪਾਠ ਕਰਦੇ ਸੀ ਉਹ ਤੋਂ ਜੋ ਗੁਰਦਾਰ ਜੀ ਲੈਉਂਦੇ ਸੀ ਤੁਹ ਜੀ ਹਾਂ ਜੀ ਇਹ ਸੱਤ ਵਾਰ ਦੁੱਤੀ ਇਹ ਅੱਖਰ ਵੀ ਪੰਜ ਵਾਰ ਆਉਂਦਾ ਜੀ ਆਸਾ ਕਿ ਵਾਰਥ ਜੀ ਦਾ ਹਈ ਤਾਂ ਪਾਂਡੇ ਘੱਟ ਹਲਡਾ ਹੀ ਬੌਜੀ ਪਾਂਡਾ ਜਨੇਊ ਬੋਲਦਾ ਪਾਂਡਾ ਵੱਡਾ ਸੀ ਤੇਰੇ ਕੋਲ ਹੋਊਗਾ ਤੂੰ ਵੱਡਾ ਇਸ ਤਰ੍ਹਾਂ ਹੀ ਨੇ ਪਾਇਆ ਸੀ ਪਹਿਲਾ ਪੰਡਤ ਨੇ ਜਿਹੜੇ ਪਾਇਆ ਸੀ ਕਾਮਣ ਗੁਰੂ ਹੈ ਜਗਤ ਦਾ ਉਹ ਪੰਡਤ ਕੋ ਦਿੱ ਜੇਗਾ पांडे ਕੋ ਚਲੇਗਾ ਤੇਰਾ ਤੇਰੇ ਕੋ ਹੈਗਾ ਤੂੰ ਪਾ ਦੇ ਜੀ ਦੇਊ ਜੀ ਦਾ ਲਾਜਵਾਬ ਹੋ ਗਿਆ ਜੀ ਦੇ ਜੀ ਦਾ ਹਾਂ ਨੇ ਫੜਕ ਜੋਰ ਪ੍ਰਾਪਤ ਜੀ ਦੇ ਪਾਈ ਗਿਆਨ ਫੜਕ ਪਾਈ ਹਾਂਜੀ ਬੁੱਧੀ ਪਾਈ ਫਿਰ ਜੀ ਦੇ ਕੋਈ ਜਿੱਤਣ ਜੀ ਦੇ ਪਾਈਆ ਬਾਹ ਲੇਕਰ ਪਾਂ ਸਿਬਲ ਹੈ ਉਹ ਤਾਂ ਆਏ ਜੇਬ ਤੇ ਜਲੀ ਕਿਰਪਾ ਨੂੰ ਦੂਰ ਹੋ ਗਿਆ ਰੋਧ ਲੋ ਜਦੋਂ ਬੋਲਦੀ ਹੈ ਜਦੋਂ ਬਬੂ ਨੇ ਉੱਠਾ ਲੇ ਕਿਰਪਾ ਬਾਹ ਲੇਕਰ ਵੀ ਲੋੜ ਪੈ ਜਾਂਦੀ ਹੁੰਦੀ ਹੈ ਆਹ ਬਤਾ ਪਣ ਸਰ ਚਲਾਈ ਦੀ ਇਹ ਸ਼ਬਦ ਪਾਂਡੇ ਸ਼ਬਦ ਰਾਮਕਲੀ ਰਾਜ ਚ ਦੋ ਜਗ੍ਹਾ ਹੋਰ ਵੀ ਵਰਤਿਆ ਜੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹਉਮੈ ਸ਼ਬਦ ਕਰ ਲਹੀਏ ਉਹ ਲੈ ਝੂਠ ਬੋਲਦੇ ਵੇ ਠੀਕ ਹੈ ਜੀ ਝੂਠ ਬੋਲਣਾ ਝੂਠ ਬੋਲ ਬੁਰਜ਼ਾਰ ਖਾਏ ਠੀਕ ਹੈ ਜੀ ਅ ਇੱਕ ਭਗਤ ਕਬੀਰ ਜੀ ਵਰਤ ਰਹੇ ਜੀ ਕਾਹੀ ਮੇਰੇ ਬ੍ਰਾਹਮਣ ਹਰਨਕ ਹੈ ਰਾਮਨਾ ਬੋਲੇ ਪਾਂਡੇ ਦੋਜਕ ਪਰ ਹੈ ਰੋਪਰ ਇਹਦਾ ਲਿਖੀਂ ਕਹਿੰਦਾ ਰਾਮ ਰਾਮ ਤਾਂ ਕਹਿੰਦਾ ਜਿਵੇਂ ਅਕਬੀਰ ਦਾ ਕਹਿਣਾ ਚਾਹੀਦਾ ਉਹ ਨਹੀਂ ਕਹਿੰਦਾ ਠੀਕ ਹੈ ਜੀ ਰੋਪਗੜ੍ਹ ਵੀ ਤਾਂ ਭੇਦਰ ਉਹਦਾ ਉਹਦਾ ਜੀ ਦਾ ਰਾਮ ਕੋਲ ਹੈ ਦੀ ਕਥਾ ਨਹੀਂ ਕਰਦਾ ਹਰ ਕੀ ਕਹਾ ਦੀ ਕਰਦਾ ਹੋਏ ਰਾਮ ਗਤ ਗਿਆ ਕੀ ਕਰਨਾ ਆਇਆ ਕੀ ਕਮੀ ਹੋ ਗਈ ਹਮਸਾਰ ਹੋ ਗਿਆ ਨੂੰ ਕਿਵੇਂ ਦੂਰ ਹੋਊ ਠੀਕ ਹੈ ਜੀ